ਸ਼ਲੋਕ ਮਹਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੱਤੇ ਸਈ ਜੇ ਮੁਖ ਨਾ ਮੋੜਨ ਜਿੰਨੀ ਸਾਈ ਝਾੜ ਝਾੜ ਪਵਦੇ ਕੱਚੇ ਬਿਰਹੀ ਜਿੰਨਾ ਕਾਰੀ ਨਾ ਆਈ ਹਾਂ ਰੱਤੇ ਸਈ ਰੰਗੋਰਾ ਨੂੰ ਜੜਦਾ ਜੇ ਮੁਖ ਨਾ ਬੋੜਨ ਜਿਹੜੇ ਮੂੰਹ ਨਹੀਂ ਬੋੜਦੇ ਜਿਹੜੇ ਸੱਚ ਤੋਂ ਗੁਰਬਾਨੀ ਤੋਂ ਉਹ ਨਿਰੋਗ ਹੋੜਦੇ ਸਤਗੁਰ ਨਾਲ ਜੁੜ ਕੇ ਵਿਖੜੀ ਦਿੰਦੇ ਗੁਰਬਾਨੀ ਨੂੰ 20 ਵਿਸਵੇ ਗੁਰ ਕਾ ਮੰਨ ਰੰਗ ਚੜਦਾ ਹੈ ਉਹ ਸਮਝੋ ਵੀ ਉਹ ਰੰਗ ਚੜਿਆ ਹੈ ਨਾਮ ਦਾ ਸਹੀ ਜਿ ਮਖਣ ਬੋਲਣ ਜੇ ਤੁਸੀਂ ਜਾਤਾ ਸਾਂਹੀ ਥੋੜੀ ਉਹ ਗੱਲ ਕਹਿਤੀ ਸੀ ਜਦ ਆਵਰਾ ਨੇ ਪਾਸ ਉਤਰਨੋਂ ਨੇ ਕਟਾਲਾਤਾ ਠੋਲਾ ਜਾ ਬਦਲਣ ਵਾਲੇ ਕਟਾਲਾਤਾ ਵੀ ਇਹਾਂ ਦੇ ਵਿੱਚ 20-20 ਵੀ ਨਹੀਂ ਹੋਰ ਕਾ ਹੋਣ ਬੰਦੇ ਉੱਥੇ ਕੌਣ ਨੇ ਠੋਗਾ ਮਾਰਤੀ ਸੀ ਵਿੱਚ ਜਿਹਨੇ ਸਮਝਾਤਾ ਸਾਂ ਜਿਨ੍ਹਾਂ ਨੇ ਆਪਣੇ ਸਾਇ ਨੂੰ ਆਪਣੇ ਮੂਲ ਨੂੰ ਸਿਆਣ ਲਿਆ ਸਮਝ ਲਿਆ ਪਛਾਣ ਲਿਆ ਉਹਨੇ ਮੁਖ ਮੋੜ ਸਕਦੇ ਕਦੇ ਵੀ ਉਹਨਾਂ ਨੂੰ ਰੱਬ ਜੀ ਨੂੰ ਚੱਲ ਗਿਆ ਸੱਚ ਦਾ ਉਹ ਮੁਖ ਨਹੀਂ ਸੱਚ ਵੱਲੋਂ ਹੋਉਂਦੇ ਚੜ ਚੜ ਪੰਦੇ ਕੱਚੇ ਬਿਰਹੀ ਜਿਹੜੇ ਕੱਚੇ ਨੇ ਉਹ ਛੱਡ ਜਾਂਦੇ ਨੇ ਇਹ ਵੀ ਕਰਦੀ ਉਹ ਗੱਲ ਆ ਦੇਖੋ ਜੁੜ ਕੇ ਚੜੇ ਹੋਏ ਨੇ ਇਹ ਕੁਝ ਕੱਚੇ ਹੀ ਛੱਡ ਜਾਂਦੇ ਨੇ ਗੁਰੂ ਘਰ ਟੁੱਟ ਕੇ ਫਿਰ ਉਹ ਦੂਏ ਧਲੇ ਨਾਲ ਚਲੇ ਗਏ ਜਦ ਗੁਰੂ ਅੰਬਦਾ ਜੀ ਨੂੰ ਦੇਤੀ ਕੋਈ ਆਈ ਟੁੱਟ ਕੇ ਕੁਝ ਅਮਰਦਾਸ ਉਹਦੇ ਟੀ ਅੰਦਰ ਦੇ ਉਹ ਨਾਲ ਰਹਿ ਗਏ ਟੁੱਟ ਕੇ ਉਹ ਕੱਚੇ ਸੀ ਬਿਰਹੀ ਉਹ ਛੱਡ ਗਏ ਗੁਰੂ ਨਾਲੋਂ ਬੇਰੀ ਜਿੰਨਾ ਕੰਨ ਨਾਲ ਜਿਹਨੂੰ ਇਹ ਸਮਝ ਲੈਣਾ ਆਈ ਕਰ ਵਿਕਰਨਾ ਕੀ ਹੈ ਸੋਝ ਘੱਟ ਸੀ ਉਹਦਾ ਬਸ ਉਹ ਛੱਡ ਗਏ ਉਹ ਗੁਰੂ ਘਰ ਨਾਲ ਟੁੱਟ ਗਏ ਉਹ ਗੁਰੂ ਘਰ ਨਾਲ ਪੰਜਵੇਂ ਪਾਸ਼ਾ ਕਿਉਂ ਕਹਿੰਦੇ ਟੁੱਟ ਗਏ ਉਹ ਗਾਲ ਟੁੱਟ ਕੇ ਕਹਿੰਦੇ ਨੇ ਜਿਹੜੇ ਚੌਥੇ ਪਾਸ਼ਾ ਨਾਲ ਜਿਹੜੇ ਜੁੜੇ ਆਪਣੇ ਉਹਨਾਂ ਦਾ ਹੀ ਭਾਈ ਸੀ ਬੜਾ ਤੇ ਉਹ ਟੁੱਟ ਗਏ ਸੱਚੇ ਕਾਰ ਆਈ ਸਮਝ ਇਹਨਾਂ ਲਈ ਕੀ ਕਰਨਾ ਠੀਕ ਹੈ ਹੋਣਾ ਦੇ ਨਾਲ ਸਭ ਟੁੱਟੇ ਟੁੱਟ ਗਏ ਹਾਂਜੀ ਠੀਕ ਹੈ ਜੀ ਚੜ ਚੜ ਪੰਮ ਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਇੱਥੇ ਸ਼ਲੋਕ 12 ਤੋਂ ਵਧੇਰੇ ਮੰਹਲਾ ਪੰਜਵਾਂ ਦੇ ਪਹਿਲੇ ਸ਼ਲੋਕ ਦੀ ਸਮਾਪਤੀ ਹੈ ਜੀ